ਪਰਬੂ ਕੇ ਸੇਵਨ ਕਾਰਜ ਪੂਰੇ ਆ ਦੇਖੋ ਰੋਕਿਆ ਜੀ ਸਬਕਾ ਸੁਬੜੂ ਕਾਰਜ ਪੂਰੇ ਆ ਜੋ ਕਾਰਜ ਪੂਰਾ ਨਹੀਂ ਹੈ ਸੇਵਨ ਤਾਂ ਆ ਗਿਆ ਅੱਧਾ ਹੀ ਹੋਇਆ ਹੈ ਇਹ ਤੋਂ ਉਪਦਾਰਥ ਪੂਰੀ ਗੱਲ ਦੇ ਨਾਲ ਦੇ ਨਾਲ ਬੁਲਾਈ ਜਾਇਓ ਇਹ ਪੂਰਾ ਕਾਰਜ ਸੇਵਨ ਦਾ ਹੋਣਾ ਵੇ ਕੁਰਬਾਨੀ ਤੋਂ ਉਹਨਾਂ ਸਮਝ ਵੀ ਆ ਗਈ ਕਿ ਕਾਇਦਾ ਜਿਹਾ ਉਦਾ ਹੀ ਹੋਇਆ ਆਪਾਂ ਅਜੇ ਤੋਂ ਸ਼ੁਰੂ ਹੋਇਆ ਆਜੂਦਾ ਹੋ ਆਜੂ ਤਾਂ ਬੇਲਾ ਹੋਇਆ ਆਜਰੇ ਜਿਹਾ ਜਾਰਦੀ ਦਾ ਦੁਨੀਆ ਦੇ ਉਤੋਂ ਵੇਲਾ ਹੋਇਆ ਉਹ ਸਮਾਜਤਾ ਹੋ ਰੇ ਉਹ ਜੋ ਖਾਲੀ ਹੋਇਆ ਉਹਦਾ ਭਾਂਡਾ ਧੋਤਾ ਜਾਂ ਸਾਫੇ ਕੀਤਾ ਠੀਕ ਤੋਂ ਦੂਜੇ ਸਕੇ ਜੋ ਹੁਣ ਪੌੜੇ ਅਸੇਵਨ ਨਾ ਪੜਨਾ ਦੁੱਦ ਫੇਰ ਨਰਾਸ ਹੋ ਕੇ ਜਬੋਲਣਾ ਫੇਰ ਉਹ ਰੜਕਾ ਦੇ ਤਾਂ ਕਿਦੇ ਵਿੱਚੋਂ ਮੱਖਣ ਨਿਕਲਣ ਹਾਂਜੀ ਪ੍ਰਭੂ ਕੇ ਸਿਮਰਨ ਕਾਰਜ ਪੂਰੇ ਪ੍ਰਭੂ ਕੇ ਸਿਮਰਨ ਕਾਰਜ ਪੂਰੇ ਪ੍ਰਭੂ ਕੇ ਚਾਰੇ ਪਦਾਰਥ ਜਿਹੜੇ ਬਿਲਦੇ ਨੇ ਕਿੰਨ੍ਹੇ ਪਦਾਰਥ ਤੱਕ ਜਦੋਂ ਪਦਾਰਥ ਅਜੇ ਪਦਾਰਥ ਇੱਕ ਉਪਰ ਬਿਲਦੇ ਨੇ ਤਾਂ ਪੂਰਾ ਕਾਰਜ ਹੋ ਇਸ ਦੋ ਪਦਾਰਥ ਜਾਬਰਤਾ ਬਣਾ ਲੈ ਦੋ ਪਦਾਰਥ ਸੁਣਾ ਦੇ। ਅਜ ਉਹ ਜਾਂਦੀ ਹੈ ਜੋ ਆਇਆ ਉਹ ਮਾਰਾ ਫੜਾਤੀ ਸਮੂਹ ਨਿਕਲਦਾ। ਪ੍ਰਾਇਮਰੀ ਕੀਤੀ ਸੀ ਤੋਂ ਉਹਨੂੰ ਕਾਲਜ ਚ ਪਹਿਲਾਂ ਹੀ ਦਾ ਦੇ। ਐਨੂੰ ਨੇ 10ਵੀਂ ਕਲਾਸ ਕੀਤੀ ਸੀ ਪਹਿਲੇ ਕਾਲਜਲਾ ਦੇ। ਠੀਕ ਹੈ ਇਹਨਾਂ ਨੂੰ ਇਹਦਾ ਕੋਈ ਸਮਝ ਨਹੀਂ ਹੈਗੀ ਲੱਗਦਾ ਸਿਮਰਨ ਨੂੰ ਗੱਲ ਇਹਦਾ ਮਤਲਬ ਹੈ ਇਹਨਾਂ ਨੂੰ ਕੋਈ ਕੁਝ ਨਹੀਂ ਕੀ ਹੈ ਕੀ ਕਰਨਾ ਕੀ ਨਹੀਂ ਕਰਨਾ ਹਾਂਜੀ ਕੇ ਸਿਮਰਨ ਕਬੂ ਨਾ ਝੂਰੇ ਪਰਬਤ ਦਾ ਸਿਮਰਨ ਵਾਲੇ ਦਾ ਨਾ ਝੂਰਾ ਉਹ ਭਾਈ ਜੇ ਗਿਆਨ ਘਟਿਆ ਕਿਸੇ ਕੋਲ ਜਿਆਦਾ ਲੈ ਲੋ ਝੂਰਾ ਦਾ ਵੀ ਇਹ ਕੋਈ ਜਿਆਦਾ ਹੈ ਜਿੰਦਾ ਹੈ ਜੇ ਕੋਈ ਨਾਲ ਦਾ ਕਲਾ ਚਾਹੇ ਯਾਰ ਉਹਦੇ ਨੂੰ ਉਹ ਚੋਰਾ ਹ ਹਮਤ ਨਹੀਂ ਆਉਂਦਾ ਉਹਦੇ ਹੀ ਪਰ ਇਹ ਝੂਠ ਦੇ ਦੇ ਇਹ ਸਦਾ ਜਿਹੜਾ ਗਿਆਨ ਅਸੀਂ ਸੋ ਧਾਰਮਿਕ ਬੰਦੇ ਝੂਠੇ ਕਹਦੇ ਨੇ ਅਸਲੀ ਅਸਲ ਸੱਤ ਨਹੀਂ ਹੈ ਕਿ ਉਹਦਾ ਉਹ ਖਤਰਾ ਹੋਵੇ ਚਾਤਾ ਪਛਤਾਵਾ ਹੋਵੇ ਤਾਰਮ ਕੋ ਜੋ ਹੋ ਰਿਹਾ ਕਰ ਕੋ ਜੋ ਹੋ ਰਹਾ ਅੰਦਰ ਪਤਾ ਹਰਦਾ ਹੈ ਤੁਹਾਨੂੰ ਪਤਾ ਵੀ ਕਦੋਂ ਗਲਤ ਕਰ ਰਹੇ ਨੇ ਆਪਾਂ ਬਹੁਤ ਇੱਜ਼ਤਵਨੀ ਹੋਈ ਹੈ ਪਰ ਜਦੋਂ ਪਤਾ ਲੱਗਿਆ ਰਹਿਣਾ ਤਾਂ ਅਖਵਰੀ ਇਹਨੇ ਕਿਉਂ ਰાવી ਹੈ ਸਿੱਧਾ ਅਧਾਰ ਆਪਣੇ ਝੁੱਕ ਛੋੜ ਗਿਆ ਛੋੜਾ ਸੀਗਾ ਅੰਦਰ ਉਹਦਾ 80 ਇਸ ਗੰਦਾ ਵੀ ਕੋ ਤਾਂ ਵੀ ਲੱਗ ਸਕਦਾ ਉਹਦਾ ਡਰ ਸੀ ਉਹ ਹੀ ਚੌਰਾ ਹੈ ਕੋਈ ਵੀ ਜੇ ਫਰਮੋਈ ਲੇ ਕੇ ਅੰਦਰ ਬਣਿਆ ਰਹਿੰਦਾ ਇਹ ਬਣਿਆ ਰਹਿੰਦਾ ਪਰ ਜਿਹੜੇ ਪ੍ਰਭ ਤੇ ਸੁਪਰ ਵਾਲਿਆਂ ਉਹਦੇ ਚੌਰਾ ਹੁੰਦੇ ਹੀ ਉਹਨਾਂ ਨੇ ਪਹਿਲਾਂ ਸੌਦਾ ਇਹਦਾ ਹੋਇਆ ਸੀ ਉੱਧਰ ਜਦ ਕੇ ਮੈਂ ਫੇਰ ਖੜੀ ਹਾਂ ਦੋਆ ਦੋ ਚਾਰੇ ਰਹਿਣੇ ਨੇ ਚੋਰ ਨਹੀਂ ਬਕਾਦਾ ਜੇ ਕੋਈ ਆਪਣਾ ਗਾਹ ਉਹਦਾ ਚੌਰਾ ਨਹੀਂ ਜੇ ਗਾਹ ਉਹ ਨਿਕਲਦਾ ਉਹਦਾ ਚੌਰਾ ਵੀ ਜਿਆਦਾ ਲੈ ਗਿਆ ਉਹਦਾ ਚੌਰਾ ਵੀ ਜਿੰਨਾ ਲਟਾਤਾ ਉਹ ਰਾਮ ਰਾਮ ਕੀ ਲੋਟ ਗੈਲਨ ਸਾਰੇ ਲੋਟੇ ਰਹਿ ਗਏ ਨੇ ਪ੍ਰਸ਼ਾਦ ਕਿਹਾ ਲੋਟ ਦਵਤੀ ਮਰਜ਼ੀ ਹੋਈਆ ਲਵੇ ਕੋਈ ਛੇਦੀ ਬੋਲ ਲਵੇ ਕੋਈ ਹੜੀਆ ਬੋਲ ਲਵੇ ਨੰ ਕੋ ਉਹ ਬੋਲਿਆ ਰਹੇ ਉਹ ਵੀ ਕੋਈ ਕੰਮ ਉਹ ਜੇ ਕੋਈ 체ਤੀ ਹੋ ਚਾਰ ਆਦਮੀ ਜਨ ਸਮਾਭੋ ਜੂ ਨਾ ਦੇ ਜਾਦਾ ਹੀ ਬਸ ਤੇ ਕਹਿਣਗੇ ਕੋਈ ਗੱਲ ਉਹ ਨੂੰ ਇਹ ਨੁਦਾਂ ਸੁਰੂ ਰੂਪ ਤੱਕ ਸਾਸਾ ਦੇ ਵਿੱਚ ਵੀ ਨਹੀਂ ਹੁੰਦਾ ਗਾਹਾਂ ਜਾ ਕੇ ਹੋ ਜਾਂਦਾ ਮੈਂ ਚੋੜਾ ਕਿ ਮੈਂ ਤੁਮੁਰ ਰੂਪ ਕਰ ਜਾ ਸਾਦਾ ਬੰਦਾ ਉਹ ਜਾਂ ਤਾਂ ਤੇ ਇਹ ਤੇ ਨਹੀਂ ਹੁੰਦਾ ਪਰ ਜਿਹੜੇ ਮਾਇਆ ਸੀ ਉਹਨਾਂ ਦੇ ਹੋ ਜਾਂਦਾ ਔਰ ਜਿਹੜੇ ੁਰਦੇ ਤੇ ਨਾਲ ਦੇ ਉਹਨਾਂ ਦੇ ਹੋਇਆ ਹੋਇਆ ਸੀ ਵੀਰੇ ਦੇ ਉਹ ਚੁਰਦੇ ਤੇ ਜਿੰਨਾ ਦਾ ਜੁਰਮ ਦੀ ਗੱਲ ਆਈ ਹੋਈ ਆ ਇਹ ਤਾਂ ਘਰੇ ਆ ਕੋਈ ਗੱਲ ਕੋਈ ਨਾ ਚੁਰਾ ਕੋਈ ਘਰੇ ਆ ਕੋਈ ਪੈਰ ਨਾ ਇਹ ਤਾਂ ਉਹ ਕਹਿ ਰਿਹਾ ਜੀ ਕੋਈ ਚੁਰਦਾ ਹੋਣਾ ਤਾਂ ਹੀ ਕਿਹਾ ਚੁਰਦਾ ਸੀ ਬੜਾ ਗੁਰੂ ਦੇ ਘਰ ਤਾਂ ਬੀਤੀ ਅੱਧਵੀ ਹੋ ਗਏ ਹਮ ਸਾਹਿਬ ਵੀ ਲੈ ਲਿਆ ਚਲੋ ਉਹ ਵੀ ਛੱਡ ਕੇ ਫਿਰ ਸੰਤ ਨੇ ਇਹ ਜਾਂ ਛੱਡ ਕੇ ਫਿਰ ਝੂੜ ਦੇ ਦੇ ਕੋਈ ਮਰਨੋ ਸੁਖ ਹੈ ਨਹੀਂ ਉਹਨਾਂ ਦੇ ਸਭ ਕੁਝ ਲੈ ਲਿਆ ਸਰਦਾਰ ਸਾਹਿਬ ਵੀ ਲੈ ਲਿਆ ਮਨ ਨੂੰ ਸੁਖ ਤਾਂ ਹੈ ਨਹੀਂ ਮਨ ਨੂੰ ਸੁਖਾਇ ਦੇਣਾ ਹੋਣਾ ਸੀ ਉਹਨਾਂ ਦੱਸ ਰਹੇ ਨੇ ਵੀ ਪ੍ਰਭ ਕਹਿ ਰਿਹਾ ਸ੍ਰੀਮਨ ਕਹੂ ਨਾ ਝੂੜਿਆ ਸ੍ਰੀਮਨ ਕੱਢ ਲੋ ਹਟ ਜਾਊਗਾ ਜਿਹਰਾਂ ਤੇ ਛੋੜਾ ਸੀ ਸਰੀਰ ਜੰਦੇ ਵੀ ਹੁਣੋਂ ਨਾ ਹੋਰ ਵੀ ਤਾਂ ਹੋਊ ਕਿ ਫਿਰ ਉਹ ਦਾਸੂ ਦਾ ਸੂਰ ਜੀ ਹੁਣ ਉਹਨਾਂ ਦਾ ਰੋਣਾ ਮਿਹਾ ਡੂਲੀ ਕਰਾਈ ਮੜੀ ਰੱਬ ਦਾ ਸੰਬਟ ਨਾਲ ਲੋਟਾ ਚੱਡੋ ਪਰੇ ਵੀ ਅਸੀਂ ਕਹਿੰਦਾ ਕਹਾਂ ਇਤੋਂ ਕੋ ਪੰਡ ਬਣ ਕੇ ਲੈ ਜਾਈਆਂ ਬਾਹਰ ਦੀ ਗੱਲ ਨਹੀਂ ਐ ਜਿਤ ਬਾਹਰ ਦੀ ਹੀ ਹੈ ਕਿ ਜੇ ਸਪਰਦ ਕੇ ਸਬੂਤ ਦੀ ਹੈ ਉਹ ਮਾਇਆ ਵੱਲ ਭੇਜਿਆ ਰਾਜਵਤਨ ਰੁਪਏ ਜੇ ਜਿਹੜੇ ਚੇਦੇ ਸੀ ਸੀ ਜਾਂਦੇ ਦੇ ਪਰ ਅਰੇ ਡਿਮੈਂਡ ਮਿਲ ਗਈ ਉਹਨਾਂ ਵੱਲ ਉੱਤਾਰ ਗਈ ਇਹ ਆਪਣੇ ਸੁਗਤਵਾਨ ਨੂੰ ਲੈ ਜਿੱਜਾ ਤਾਂ ਆਖਰ ਰਹਿਣਾ ਤਾਂ ਸੱਚ ਦੀ ਅਜੇ ਤਰ੍ਹਾਂ ਨਹੀਂ ਲੱਭ ਕੋਈ ਹੋ ਜਾਣਾ ਸਾਰੇ ਘੋਟੇ ਸਭ ਤੋਂ ਇੱਕ ਨਹੀਂ ਸਮਝ ਲੱਗੀ ਗੱਲ ਵੀ ਜਦੋਂ ਇਹ ਜੈਦਾਸਨ ਤੋਂ ਜਿਹੜੀ ਗੁਰੂ ਜੀ ਨੇ ਆਪਣੇ ਆਵਾਜ਼ ਨੂੰ ਦਿੱਤੀ ਹੈ ਜਿਹਨਾਂ ਨੇ ਬਣਦੀ ਉਹ ਫਿਰ ਜਿਹੜੀ ਉਹਨਾਂ ਦੀ ਜਨਤਰੀ ਸੀ ਜਿਹੜੀ ਗੁਰਗੱਦੀ ਵਾਲੀ ਗੱਲ ਦੇਖੀ ਨੂੰ ਕੋਈ ਜੱਤੀ ਦੀ ਜਿਹੜੀ ਮਰਗੇ ਭਾਈ ਜਿਹੜਾ ਨਾਲ ਜੈਦਾ ਦਿੱਖ ਨਹੀਂ ਚ ਉਹ ਇਹਦਾ ਮਨ ਚੜਾਵਾਂ ਦਾ ਸੀ ਇਹਦਾ ਸੀ ਨੰਘ ਚੱਲਦੇ ਸੀ ਇਕੱਠਾ ਵੀ ਹੋ ਜਾਂਦਾ ਸੀ ਉਹਦੇ ਨਾਲ ਖਰਚਾ ਵੀ ਜਾਂਦਾ ਸੀ ਬਹੁਤਾ ਸੀ ਪੈਸਾ ਤਾਂ ਐਸੀ ਗੱਲ ਨਹੀਂ ਸੀ ਜਿਹਦੀ ਸੀ ਅਮਨੇ ਜੜਾਈ ਦਾ ਜਿਹੜਾ ਹੈਗਾ ਮਾਇਆ ਹੋਣੀ ਮਾਇਆ ਦੇ ਇਰਾਦੇ ਤਾਂ ਉਹਨਾਂ ਦੇ ਮਾਇਆ ਦੇ ਇਰਾਦੇ ਸੰਸਾਰੀ ਜਿਹਦਾ ਬੜੀ ਬੁਢੀ ਬੁਢੀ ਹੋ ਗਈ ਵੀ ਹਾਂ ਉਹ ਇੱਕ ਅਲੱਗ ਅਲੱਗ ਅਲੱਗ ਕੋਈ ਨਾ ਨੂੰ ਹਰਕਤ ਜਿ ਲੈ ਜੀ ਉਹ ਵਿਸ਼ਵਾਸ ਵੀ ਸੀ ਦੇ ਵੀ ਕੁਝ ਗੱਲ ਹੁੰਦੀ ਹੈ ਅੱਜ ਕੜਾ ਲੋਕਾਂ ਨੂੰ ਵਿਸ਼ਵਾਸ ਆ ਰਹੀ ਹੈ ਕੋਈ ਗੱਲ ਹੈ ਫਿਰ ਆ ਜਾਗਾ ਲੋਕੋ ਵੀ ਆ ਜਾਈਂਗਾ ਅੱਜ ਵਿਸ਼ਵਾਸਾਂ ਲੋਕਾਂ ਲਈ ਆਪਾਂ ਇੱਥੇ ਗੱਲ ਕਰਦੇ ਹਾਂ ਬਾਜਾ ਦੇ ਕੁਝ ਲੋਕ ਨੂੰ ਵਿਸ਼ਵਾਸ ਦਾ ਲੱਗ ਜਾਵੇ ਦੇਖ ਲੋਗ ਉਸ ਰਾਤ ਕਦਨੈਸ ਗਾਉ। ਉਹ ਦਲੀ ਗਾਣ ਗੀ। ਉਹ ਗੱਲ ਅਲੱਗਾ ਵੀ ਜਿਆਦਾ ਪੜੇ ਲਿਖੇ ਆਦਮੀ ਜਾਣ ਲੱਗ ਰਹੇ ਹਾਂ ਆਉਥੇ ਹੀ ਕਿ ਨਾ ਆਏ ਨਹੀਂ ਕਿਦਾਂ। ਉਹ ਐਨਕ। ਫਿਰ ਵੀ ਜੋ ਕਹਿ ਬਿਦੰਗੇ ਬਾਕੀ ਲੋਕ ਕੋਲ ਤੇ ਦੂਜੇ ਲੋਕਾਂ ਨੂੰ। ਠੀਕ ਆ ਤੁਸੀਂ ਜੋ ਵਧੀ ਕਰੀਏ ਉਹ ਅਸੀਂ ਕਿਹਾ ਜਾਣ। ਉਹ ਸ਼ਹਿਰ ਦੇ ਵਿੱਚ ਕੀ ਕੀ ਹੈ? ਕੀ ਕੀ ਨਹੀਂ ਜਾ ਅਸੀਂ ਜਾਣ ਲਈ ਦੀ। ਉੱਥੇ। ਜਿ ਜੋ ਮਰਜੀ ਕਰੀ ਜਾਓ। ਰੱਬ ਕੇ ਸਿਮਰਨ ਹਰ ਗੁਣ ਬਾਣੀ ਰੱਬ ਕੇ ਸਿਮਰਨ ਹਰ ਗੁਣ ਬਾਣੀ ਜਿਹੜੀ ਬਾਣੀ ਹੁੰਦੀ ਹੈ ਰੱਬ ਦੇ ਸਮਝ ਬੋਲਿਆ ਜਾਂਦਾ ਉਹਦੇ ਹਰਿ ਦੇ ਗੁਣਾਂ ਤੋਂ ਬਿਨਾਂ ਹੋਰ ਕੁਝ ਨਹੀਂ ਹੌਜਦਾ ਹਰ ਗੁਣ ਗਾਣੇ ਰੱਬ ਕੇ ਸਿਮਰਨ ਦੇ ਦੌਰਾਨ ਜੋ ਕੁਝ ਬੋਲੇ ਜਾਊਗਾ ਉਹ ਹਰਿ ਦੇ ਗੁਣਾਂ ਨੇ ਹੋਊਗਾ ਉਹ ਤੇ ਹੀ ਹੋ ਸਕਦਾ ਸਾਡੀ ਬਾਣੀ ਆਤਮ ਗੁਣ ਬਾਣੀ ਹੁੰਦੀ ਓ ਗੁਣ ਗਾਣੇ ਅਕੀਕਤ ਹੈ ਇਹ ਉਹਨਾਂ ਪ੍ਰਭ ਤੇ ਸਭੂ ਲੋ ਬਾੜਿਆ ਦੀ ਹੀ ਬੋ ਜਿਓਈ ਇਹ ਉਹ ਅਵਸਥਾ ਦੀ ਗੱਲ ਹੈ ਕੰਮ ਹੋ ਕੇ ਸਵਰਨ ਸਾਇੰਸ ਸਮਾਨੀ ਪ੍ਰਭ ਦੇ ਸਭੂ ਦੇ ਵਿੱਚ ਸਾਇੰਸ ਅਵਸਥਾ ਦੇ ਵਿੱਚ ਓਕੇ ਜੇ ਜੋਤੀ ਜੋਤ ਜੋਤੀ ਜੋਤ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਜੋਤੀ ਜੋਤੇ ਕੋਈ ਅਭੀ ਸਮਾਧੀ ਦਾ ਸੋਤ ਜ્યોਤੀ ਜੋਤ ਬਿਲੀ ਲਫਜ਼ ਵਰਤਿਆ ਨੁੱਥੇ ਸਬੂਲ ਬੀ ਆ ਰੋ ਸੋਤੇ ਜਿਹੜੀ ਆਪਣੇ ਅੰਦਰੇ ਟਿਕ ਜਾਂਦੀ ਹੈ ਪਹਿਲਾਂ ਉਹ ਟਿਕ ਕੇ ਰਹੇ ਤਾਂ ਤੇ ਅੰਦਰ ਟਿਕ ਜਾਂਦਾ ਇਹਨੂੰ ਕਹਿੰਦੇ ਜ્યોਤੀ ਜੋਤ ਬਿਲੀ ਮੇਰੇ ਕੋਲ ਚੁੱਜੀ ਜਿਹੜੀ ਵਾਰੰਟੀ ਰੰ ਦੀ ਜਬ ਜਗਵਾਲ ਹੋ ਗਈ ਆ ਦੇ ਗਿਆਨ ਅੰਦਰ ਨਹੀਂ ਜੋਤ ਬਾਹਰ ਨਿਕਲਦੀ ਹੋਈ ਕਤਿ ਜਲਦੀ ਸਕਦਾ ਕਿ ਬਾਹਰ ਦੇ ਲੋਕ ਇਹ ਇਹ ਜਿਹੜਾ ਫੋਨ ਹੈ ਸਮਝਾ ਚੱਲ ਨਹੀਂ ਸਕਦਾ ਕਿਧਰ ਇਹ ਘਰੇ ਆਵੇ ਇਹ ਜੋਤੀ ਜੋਲੀ ਪੋਲ ਨਾ ਕੋਈ ਵਿਸਾਇ ਗਿਆ ਅੱਗੇ ਦਾ ਜਿਹੜਾ ਹੈ ਕਿ ਕੋਈ ਤਾਂ ਗੁਬੇ ਵਾਲੀ ਹੈ ਜੋ ਸਾਗੇ ਉਹ ਵਿਚਾਲੇ ਵਾਲੀ ਜਗ੍ਹਾ ਦਾ ਨਾ ਜਿਵੇਂ ਉਹ ਤਾਂ ਉਗਣ ਤੱਕ ਦਾ ਜਿਹੜਾ ਸਮਝ ਨਾ ਕਿ ਇੱਕ ਬੁੱਧੀ ਜਲਕਾਰ ਦੇ ਚਾਤਰ ਨੂੰ ਖਪਾਵਾ ਜਿਹੜਾ ਹੈ ਨਾ ਕਿ ਆਰਾਧਨ ਦੇ ਸ਼ਬਦ ਤੇ ਇੱਥੇ ਜਿੱਥੇ ਤਾਂ ਪਰਪਕਾਰ ਉਹ ਤਾਂ ਸਬੂਲ ਸਿਮਰਨ ਚੋਂ ਸ਼ਕਤ ਬਚਾਅ ਚੋਂ ਤਾਂ ਜੋ ਲਭੂਗਾ ਉਹਦੀ ਬਹੁਤ ਸੂ ਪਰਪਕਾਰ ਕਰੂਗਾ ਜਿਹੜਾ ਉਹਦੇ ਤੇ ਆਪਣਾ ਤੇ ਉਹ ਅਸਰ ਪਊਗਾ अपरामन को दूँगा अपमान का बदला को किया जाएगा जो भी संबंध होगा वो ना तो गल खड़ी है <laughs> फिर भी किथे जाकर रुक जाना बनता मानता ये भी रुकदा जे काम परम का चल भी चला गया पहला कत्पई होता सब तौफदी वता जाकर रुक जाता है क्योंकि उत्तर दोबारा जन्म दोबारा जातेलु या विस्फोट होई ਬਰ ਗੁਦਾ ਨਾ ਬੰਦਦਾ ਉੱਥੇ ਚਾਹਣਾ ਫੁੱਟਣਾ ਨਾ ਪਰ ਅਬਦਾ ਪੂਰੇ ਪ੍ਰੈਸ਼ਰ ਨਾਲ ਜਾਂਦੇ ਨੇ ਫੇਰ ਅੱਗੇ ਚੱਲਦੇ ਬਰੂਦ ਅੰਦਰ ਹੁਟਾ ਅਗਲਾ ਗੇਂਦੀਆ ਅੰਦਰ ਹੁੰਦਾ ਜੇ ਨਾ ਫਟਦਾ ਨਹੀਂ ਹਵਾ ਜਲੀ ਪਾਉਂਦਾ ਫਿਰ ਤੋਅ ਸੇਤਾ ਪਾਉਂਡੂ ਹੋ ਜਾਣਾ ਗਿਆ ਕਰਕੇ ਇਹ ਜਿਹੜੀ ਅਗਲੀ ਸਟੇਜ ਹੈ ਉਹ ਸੱਤ ਸੱਤ ਵਕਤੋਂ ਕਾਹ ਅੱਗੇ ਚੱਲਦੀ ਹੈ ਫਿਰ ਉਹਨੂੰ ਪਰਮ ਦਾ ਠੀਕ ਹੈ ਫਿਰ ਉਹਨੂੰ ਕਾਤ ਪਾਈ ਹੈ ਬਿਸ਼ਰਾਮ ਦੇਖੋ ਪਹਿਲਾਂ ਕਾਤ ਪਾਈ ਹੈ ਫਿਰ ਬਿਸ਼ਰਾਮ ਪਹਿਲਾਂ ਜਿੱਥੇ ਦੁਨੀਆ ਦੀ ਅਕਲ ਖੜੀ ਸੀ ਜਿੱਥੇ ਦੁਨੀਆ ਦਾ ਗਿਆਨ ਖੜਾ ਸੀ ਉੱਥੋਂ ਕੌਣ ਚੱਲਦੀ ਗੁਰਬਾਣੀ ਲੈ ਕੇ ਚੱਲਦੀ ਨਾ ਚੱਲੀ ਜਦ ਅਸੀਂ ਅਥ ਬਦਲੇ ਪਹਿਲਾਂ ਉੱਥੇ ਚੱਲੀ ਇੱਕ ਤਾਂ ਜਾ ਕੇ ਵਿਸ਼ਰਾਮ ਤੇ ਘਰ ਜਾਣ ਨਾਲ ਸਭ ਤੋਂ ਹੋ ਗਿਆ ਤੇ ਥੋੜੀ ਜਿਹਾ ਸ਼ਾਂਤ ਹੋ ਗਿਆ ਜੋ ਕੁਝ ਬਾਹਰੋਂ ਜਾਗਣਾ ਸੀ ਸੌਣਾ ਸੀ ਸਮਝ ਨਹੀਂ ਸਮਝ ਲੈ ਇੱਕ ਤਾਂ ਕੇ ਵਿਸ਼ਰਾਮ ਉਹ ਬਾਕੀ ਕਿਥੋਂ ਆਦੇ ਆ ਜੋ ਹੋਰ ਭੁੱਖਾ ਉਹ ਉਹ ਥੋੜਾ ਆਦਿ ਨਾ ਉਹ ਆ ਸੇ ਬੁੱਲ ਨੇ ਪ੍ਰਭੂ ਕੇ ਤਾਂ ਉਹ ਪੜਾ ਲਿਖੋ ਉਹਨਾਂ ਘਟਾ ਆ ਜੋ ਬੈਂਕ ਦੇ ਪੈਸੇ ਚਾਹੀਦੇ ਹੋ ਬਾਹਰ ਹੀ ਗਿਆ ਲੜੇ ਬਈ ਨਾ ਪੂਰਾ ਨਹੀਂ ਆਇਆ ਕਾਜ ਅਰੰਭੇ ਜਿਵੇਂ ਬਈ ਟਹਿਦੀ ਪੂਰਾ ਪਹਿਲੇ ਨੇ ਸੌਦਾ ਖਰੀਦਿਆ ਪਿਆ ਉਹ ਤਾਂ ਉਹਨੇ ਹੀ ਤੇ ਖਰੀਦਿਆ ਪਿਆ ਉਹ ਪਹੁੰਚ ਗਿਆ ਉਹ ਤਾਂ ਲੈ ਭੱਤੀ ਕੀ ਇਹ ਹੋਊਗਾ ਬਿਆਲਾ ਕਾ ਮਜੇ ਸੱਟਿਆ ਗਿਆ ਹੋਆ ਪਰੇ ਬਾਗਲਾ ਗੁਰਮੁਖੇ ਹਰ ਪਾਇਆ ਜੋ ਤੇ ਗੰਨ ਦੀ ਗੱਲ ਅੱਲਾ ਪੂਰੇ ਪਿਆ ਤਾਂ ਹੋਣਾ ਹੀ ਉਹ ਕਰਜਤ ਹੋਵੇ ਸੰਸਾਰ ਦੇ ਕਾਰਜ ਉਹ ਕਾਰਜ ਤਾਂ ਅਨੰਤ ਕਾਰਜ ਉਹ ਕਾਰਜ ਹੈ ਇੱਕ ਤੋਂ ਬੋਦਾ ਕਾਰਜ ਹੁੰਦਾ ਹੈ ਕਾਰਜ ਅਭਿਸ਼ਰਮਾਕਾਰੀ ਹੁੰਦਾ ਅੱਪਾ ਇਹ ਵੀ ਕਾਰਜ ਹੈ ਕਹਿੰਦੇ ਸंसारी ਕਮਨ ਇਹ ਵੀ ਕਾਰਜ ਹੈ ਕਿ ਕੰਮ ਉਹ ਕਾਰਜ ਹੈ ਸੰਤਾਂ ਦੇ ਕਾਰਜ ਉੱਤਰੇ ਮਕੀਨੇ ਪਕੜੇ ਹੁੰਦੇ ਨੇ ਬੇਟਾ ਆਪਣੇ ਸੁਸਾਰੀ ਕਮ ਕਾਰਜ ਜਿਹੜੇ ਨੇ ਆਪਣੇ ਇਹਨਾਂ ਨੂੰ ਹੀ ਕਾਰਜ ਕਰਨ ਲੱਗ ਗਿਆ ਕਾਰਜ ਹੋਜੀ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿਜ ਸਮਾਨ ਪ੍ਰਭ ਕੇ ਸਿਮਰਨ ਸਹਿਜ ਸਮਾਨ ਪਰਬ ਦੇ ਸਰੋਵਰ ਦੇ ਵਿੱਚ ਸਹਿਜ ਅਵਸਥਾ ਦੇ ਵਿੱਚ ਇੱਕ ਚੀਜ਼ ਬਣੀ ਹੋਈ ਸੀ। ਨਕਤੀ ਗਈ ਟਿੱਕੀ ਗਈ ਟਿੱਕੀ ਗਈ ਟਿੱਕੀ ਗਈ ਜਾਂ ਬਿਲਕੁਲ ਤੇਜ਼ ਸੀ ਲਾਈਟ ਟਾਰਚ ਸੀ ਹਲਦੀ ਸੀ ਥੋੜ੍ਹੀ ਥੋੜ੍ਹੀ ਪਤਾ ਲੱਗਦਾ ਸੀ ਕੋਈ ਰਾਈਟ ਸੀ ਲਾਈਟ ਘੁੱਮਦੀ ਜਾਂ ਬਿਲਕੁਲ ਤੇਜ਼ੀ ਕੋਈ ਹੋ ਗਿਆ ਤਾਂ ਰਹਿ ਜਾਂਦਾ। ਜਾਂ ਜਦ ਹਲਦੀ ਸੀ ਉਹ ਲਾਈਟ ਉਹਦੇ ਵਿੱਚ ਥੋੜਾ ਫਰਕ ਪਉਦੀ ਸੀ। ਤੇ ਦੇਖ ਪ੍ਰਭੂ ਕੇ ਸਿਵਰਨ ਨੈਚਰ ਅਸੋ ਜਿਆਦਾ ਲਾਈਟ ਇਕੱਠੀ ਹੋ ਜਾਂਦੀ ਹੈ ਕੋ ਜਲਦੀਆਂ ਅੰਦਰ ਬੁੱਧੀ ਦੀ ਸ਼ਕਤੀ ਵਜੋਂ ਜਮਨ ਉਹ ਸ਼ਕਤੀ ਪੂਰਨ ਪਰਮਦੇਵ ਸਾਧਵਨ ਸਭ ਨੂੰ ਨਹੀਂ ਸਕਦਾ ਕੋ ਬੁੱਧ ਤੋਂ ਬਿਨਾ ਸਭ ਨੂੰ ਹੋਏ ਨਹੀਂ ਸਕਦਾ ਜਦ ਨਾਨਕ ਪੂਰਨ ਜਦ ਇੱਕ ਉਹਦਾ ਜਿਆਦੇ ਦੀ ਇੱਕ ਬੁੱਧ ਹੁੰਦੀ ਹੈ ਜਦ ਪੂਰੀ ਬੁੱਧ ਹੁੰਦੀ ਹੈ ਦੇਖੋ ਜੇ ਪੂਰਾ ਜੋਰ ਨਾ ਲਾਵੇ ਲਾਉਣ ਉਹ ਜਿਹੜੇ ਹੁੰਦੇ ਨੇ ਲੇਬਰ ਵਾਲੇ ਚੱਕੋਂ ਦਾ ਸਮਾਂ ਉਹ ਕਹਿੰਦਾ ਤੂੰ ਜੋਰ ਨਹੀਂ ਲਾਉਂਦੇ ਸਾਰੇ ਆਦਮੀ ਲੜ ਕੇ ਛੇ ਮਰਦਾਂ ਦੀ ਨਾ ਜੋਰ ਲਾਉਣ ਇਹ ਜੋਰ ਇਹਦੇ ਜਿਹਾ ਦਮ ਦਾ ਜਿਹਾ ਪੂਰ ਬទੂਦੀ ਪਹਿਲਾਂ ਜੋ ਨਹੀਂ ਕਾ ਤੂੰਦੀ ਹੋਈ ਜਿਹੜੀ ਮਤਲਬਾ ਕੁਰਬਾਨੀ ਤੇ ਜੂਲ ਸਰ ਕੁਛ ਫਰੀਕ ਹੋਰ ਕਰ ਲਵੇ ਇਹ ਕੁਛ ਇਹ ਤਾਂ ਗਾਂ ਵੀ ਕਰਛਾ ਦਾ ਹੁੰਦਾ ਹੈ ਨਾ ਜੇ ਬਰੀਕ ਹੋਈ ਜਾਂ ਉਹ ਉਹ ਗੱਲ ਹੋ ਰਿਹਾ ਕਿ ਤਾਹਦਾ ਜਿਉਂ ਪਿਸਣਾਇ ਕੋ ਦਾ ਤਾ ਪਿਸਣਾ ਇੱਕ ਟਕਾਣੇ ਕੋ ਵੀ ਸਲੀ ਲੇ ਕਾਟਾ ਉਹ ਵੀ ਕਰਕੇ ਕਾਲਿਆ ਖਬੀਰ ਤਾਂ ਕਹਿੰਦਾ ਕੋਈ ਤਾਂ ਪਹਿਲਾਂ ਕੀ ਹੀ ਹੈ ਉਹ ਕੰਨ ਨੂੰ ਵੀ ਹੀ ਜੋ ਨਾ ਸਰਵੇਂ ਨੂੰ ਵੀ ਨਹੀਂ ਸਰਵੇਂ ਨੂੰ ਪੀਸੀ ਆਈ ਦਾ ਹੁੰਦਾ ਕਹਿੰਦੇ ਇਹੋ ਪੀਸੀ ਉਹ ਦਿੰਦੇ ਤਰੀਆਂ ਤੋਂ ਜੇ ਤੇ ਬਾਹਲੇ ਜਰਾ ਬਿਰਾਏ ਅੱਖ ਦੇ ਵਿੱਚ ਕਹਿੰਦੇ ਰਣਕ ਪੈ ਜਾਣੀ ਹੋ ਗਈ ਸਰਵੇਂ ਅੱਖ ਨੇ ਦੱਸਦਾਂ ਨਾ ਅੱਖ ਬਹੁਤ ਨਰਮ ਚੀਜ਼ ਆ ਇਹ ਬੁੱਧੀ ਬਹੁਤ ਨਰਮ ਆ ਜਦੋਂ ਦੀਵੇ ਤੇ ਗੜਬੜਾ ਕੋਈ ਤੁਸੀਂ ਝੱਪ ਪੈਦਾ ਹੋ ਜਾਂਦੀਆਂ ਅੰਦਰ ਵਿੱਚ ਯਾਰ ਗੱਲ ਬੜੀ ਦੀ ਹੈ ਯਾਰ ਕੁਝ ਹੈ ਉਹ ਕੋਈ ਰੋਣੀ ਪੀਸਣੀ ਪੈਦੀ ਉਥੇ ਜਿੱਤੇ ਆ ਕੇ ਅਰਦੇਆਂ ਪੇ ਫੇਕੀ ਦੇਉ ਬਰੀ ਕਰਦੇ ਤਾਂ ਇਹ ਪਾਣੀ ਪੱਕਾ ਭੈੜੂ ਪਾਣੀ ਦੋ ਹਰ ਜਾਣ ਕੇ ਪੀਸਣ ਦੀ ਇਸ ਕਮਾ ਉਹ ਹਰ ਜਾਣ ਕੇ ਪੀਸਣੇ ਹਰ ਜਾਣ ਬਰੀ ਕਾਤਾ ਖਾਂਦਾ ਬਰੀ ਗਿਆਨ ਹਉ ਤੇ ਹਰ ਜਾਣ ਵਾਲਾ ਗਿਆਨ ਹੋਰ ਬਰੀ ਤੇ ਉਥੇ ਉਹ ਪੀਸਣਾ ਪੈਂਦਾ ਬਾਰ ਤਾਂ ਸਰ ਜਾਂਦਾ ਜੈਸੇ ਮਰਜ਼ੀ ਕਹਿ ਦੋ ਪਰ ਕੇ ਜਾ ਸਕਦਾ ਰ ਖੋਜ ਜਦ ਮੈਂ ਤਾਂ ਥੇਮ ਬਿੜੇ ਰੱਖ ਦਈਏ ਹਾਂ ਪ੍ਰਭੂ ਕੇ ਸਵਰਨ ਨੇਚੇ ਲਾਸਨ ਪ੍ਰਭੂ ਕੈ ਸੁਨਨ ਨੇਚੇ ਹੁੰਦਾ ਅਸਨ ਕੀ ਅਸਨ ਬੋਲਦੇ ਹਾਂ ਜੋਂਦਾ ਅਸਨ ਮਾਂ ਜੋਂਦਾ ਬਣਾ ਠੀਕ ਹੈ ਜੋ ਬੈਸਣ ਹੈ ਅਸਨ ਪੈਸਣ ਫਿਰ ਨਾ ਤੇ ਬੈਠਾ <Sus> बैठे ही महादेव थे ठीक है ये का पैकर छोड़ता है हल्का पैकर का छोटा है या ऊपर लदा है तो उठ के आप ज्ञान ਕੌਤਿਸ ਸਰਵਣ ਆ ਜਿਹੜਾ ਕਮਲ ਹੈ ਉਹ ਦੀ ਵਿਕਾਸ ਪੈਦਾ ਹੋਇਆ ਕਮਲ ਵਿਕਾਸ ਪੈਦਾ ਹੋਇਆ ਵਿਕਾਸ ਕੋ ਖੜਿਆ ਨਹੀਂ ਵਿਕਾਸ ਜਦੋਂ ਨੂੰ ਪਤਾ ਸਦਾ ਵਿਕਾਸ ਸਦਾ ਹੁੰਦੀ ਹੈ ਮਨ ਖੜਦਾ ਮਨ ਖੜਦਾ ਮਨ ਖੜ ਗਿਆ ਤੇ ਫੁੱਲ ਗਿਆ ਫੁੱਲ ਗਿਆ ਖੁੱਲ ਗਿਆ ਜੇ ਤੁਸੀਂ ਬੰਦ ਸੀ ਇਹ ਕਮਰੇ ਬਿਗਾਸ ਨੂੰ ਖੁੱਲ ਗਿਆ ਕਹਿ ਤਾ ਉਹ ਤੇ ਗੋੜਾ ਫਟ ਗਿਆ ਕਹਿ ਤਾ ਜੋ ਬੋਲਦੇ ਵੀ ਚੀਜ਼ ਸੀ ਬਾਹਰ ਵਾਲੀ ਪਰ ਮਾਲਾ ਨਾ ਫਟੇ ਬਾਂਚੇ ਪਰ ਸੀ ਗਾਇਬ ਹੋ ਗਏ ਹਾਂ ਰਹਿ ਜਾ ਪ੍ਰਭ ਕੇ ਸਿਮਰਨ ਅਨਹਦ ਚ ਉਪਾਰ ਆ ਦੇਖੋ ਪ੍ਰਭ ਕੇ ਸਿਮਰਨ ਨਾਲ ਫਿਰ ਅਨਹਦ ਚ ਉਪਾਰ ਪੜਨ ਲੱਗ ਜੇ ਇੱਥੇ ਗਲਤੀ ਸੁਣ ਦਿੱਤੀ ਕੀ ਨੋਟ ਆ। ਹਾਂ ਜੇ ਤੁੰਕਾ ਹੈ। ਸੋਚੀ ਆਪੇ ਜਿਹੜੀ ਇੱਥੇ ਫੁਰਨ ਲੱਗਦੀ ਹੈ ਬੰਦ। ਰੱਦ ਫੁਰਨ ਲੱਗਦੀ ਹੈ। ਨਾਮ ਫੁਰਦਾ ਘਰੇ ਆ ਕੇ ਫੁਰਨ ਸ਼ੁਰੂ ਹੋ ਜਾ। ਉਹ ਕਿਵੇਂ ਅ ਸੋਈ ਨਾਮ ਅਛਾ ਭਗਤਾ ਭਗਤਾਨ ਨੂੰ ਉਮਰਦਾਸ ਗੁਰ ਕੋ ਸ਼ੁਰੂ ਹੋ ਜਾਏ। ਜਿਆਦਾ ਰੋੜ ਕੋ ਹੋ ਜਾਂਦੀ ਹੋਲੀ ਸ਼ੁਰੂ ਹੋ ਗਈ ਪਤਾ ਲੱਗਿਆ ਨਾਨਕ ਰੰਗੜੀ ਘੂਮੇ ਹੋ ਤੁਰ ਤੇ ਮਿੱਟੀ ਚਾਲਾ ਸਕਦਾ ਜੇ ਅਤਿਰੋ ਭੁਰੂ ਵੀ ਤਾਦੂ ਵਰਤੀ ਨਹੀਂ ਕਰੇਗਾ ਦੀ ਗਲਤੀ ਕਰਦੀ ਸਵਾਦ ਨਾ ਕੀ ਅਜ ਅਤਿਰੋ ਨਾ ਵਰਦੀ ਉਹਦਾ ਜਨ ਬਾਰੋਂ ਅਤਿ ਸੁੱਕਾ ਹੋ ਜਾਣੀ ਕੋਈ ਸ਼ਕਾ ਪਾਗਵੇ ਗੁਜਾਰ ਪੈਦਾ ਹੋ ਜਾਣੋ ਕੋਣਾ ਦੇ ਵੀ ਬਦਵਾਨ ਹੁੰਦਾ ਜੀ ਨੂੰ ਉਹਨੂੰ ਸੋਖਾ ਲੱਗਦਾ ਵੀ ਪਤਾ ਨਹੀਂ ਛੇ ਦੇ ਕੀ ਅਰਥ ਹੈ ਗੰਦਰੇ ਅੰਦਰ ਸੈਟੀਫਾਈ ਹੋ ਕੇ ਆਉਂਦਾ ਦਾ ਆਉਂਦਾ ਦੀ ਬਾਣੀ ਨਾਲ ਸੇ ਅੱਜ ਆ ਜਾਂਦਾ ਸਾਰੀ ਆਪਣੀ ਆਪਣੀ ਬੁਰੀ ਹੈ ਆਪਣੀ ਆਪਣੀ ਬੁਰੀ ਜਿਹੜੀ ਪਰਿਆ ਉਹਨਾਂ ਉਹੀ ਗੱਲ ਹੁੰਦੀ ਭਰ ਆਪਣਾ ਵਿਆਖਿਆ ਆਪਣੀ ਆਪਣੀ ਹੈ ਸਾਰੇ ਪਾਸੇ ਦੀ ਨਹੀਂ ਕੋਈ ਜਾਲ ਲਕੜੀ ਜੋ ਅੱਗੇ ਕਰਨੀ ਆਪਣੀ ਆਪਣੀ ਵੱਖਰੀ ਉੱਠਣੀ ਆਉਣੀ ਆਲੀ ਪਤਾ ਕਿਉਂ ਤਾਂ ਇਹ ਤਾਂ ਉਗਿਆ ਤਾਂ ਆਪਣਾ ਆਪਣੀ ਆਇਆ ਆਪਣੀ ਤਰੋਕੇ ਉਗਦੀ ਤਾਂ ਵੀ ਚੀਜ਼ ਹੁੰਦੀ ਹੈ ਜੋ ਉਗਿਆ ਉਹ ਨਮਾਇਨ ਪਹਿਲਾਂ ਉਗਿਆ ਸੀ ਉਹ ਤਾਂ ਭੁਲਿਆ ਗਿਆ ਉਹ ਉਹ ਜੇ ਉਹ ਕੱਲ ਕਿਆ ਹੋਈ ਹੈ ਆਪਸ ਹੋਈ ਪਰ ਅਰਥ ਕਰ ਲਾ ਜੇ ਉਹ ਕਾਦੇ ਨਹੀਂ ਹੁੰਦੇ ਪਹਿਲੇ ਕਾਦੇ ਨਹੀਂ ਹੁੰਦੇ ਸਦਾ ਕੋਈ ਉਰਫੁਰਿਆ ਬੁਰਫੁਰਿਆ ਨਾ ਚਾਹ ਗਿਆ ਗੱਲ ਹੋਈ ਹੈ ਕੱਟਾ ਨਹੀਂ ਪੈਂਦਾ ਗਹਿਰਾਈ ਦਾ ਹੀ ਫਰਕ ਹੈ ਆਟਾ ਹੀ ਪੀਸੇ ਨਹੀਂ ਹੋ ਦੁਬਾਰਾ ਪੀਸ ਗਿਆ ਫਰਮਾਈ ਦੁਬਾਰਾ ਲਗੜਿਆ ਹੋ ਤਾਂ ਕੁਝ ਨਹੀਂ ਪਰ ਜਿੰਨਾ ਪਹਿਲਾਂ ਲਗੜਿਆ ਤਾਂ ਉਹ ਤੋਂ ਜ਼ਿਆਦਾ ਰਗੜਿਆ ਗਿਆ ਇਹ ਜੂਲ ਪਤਾ ਲੱਗਦਾ قالو تو اوچھی نہیں آ سکتے گل گل دی اوں پھر شادی یہ کہانی ہے پھر ٹھیک ہے یہ اورے دی ہے پھر پھر تا کو ڈوپلیکیٹ ہے 아이디 ہرے جتنا پہلا جتے جدی جگہ تیز ہو تے تیز ہو دی رڑی رڑی وہ گل کر ਉਡੀਕ ਨੂੰ ਘਰ ਤੋਂ ਨਿਕਲਦੇ ਜਦੋਂ ਉਤਾਰ ਤੇ ਥੋੜਾ ਵੇ ਤਾਂ ਹਾਂ ਸਰਤ ਵਿੱਚੋਂ ਸ਼ਬਦ ਆਪੇ ਰੋਣ ਲੱਗਦੇ ਆਪੀ ਸਮਝਉ ਨਾ ਗੱਲ ਜਿਵੇਂ ਆਪਾਂ ਨੂੰ ਆਪਣੀ ਯਾਦ ਆ ਗਿਆ ਉੱਥੇ ਚੰਗਿਆਂ ਨੂੰ ਉਹ ਰਣਜੀਤ ਤੇਰੇ ਉਹਨਾਂ ਜਿੰਬਾਰੀ ਆਹੋ ਕੋਈ ਜੀ ਜਪਨ ਸੁਦਾਬ ਨਹੀਂ ਆਦਾ ਉਹਨਾਂ ਜਿੰਬਾਰੀ ਆਹੋ ਜੀ ਸੁਖ ਪ੍ਰਭ ਸਿਮਰਨ ਦਾ ਅੰਤਨਾਪਾ ਇਸ ਕਰਕੇ ਉਹਦੀ ਅਨੰਦ ਚੰਕਾਰ ਉਹਦਾ ਜਿਹੜਾ ਸੁੱਖ ਹੈ ਸੁਖ ਪ੍ਰਾਪਤ ਜਿੰਨੇ ਦਾ ਅੰਤਨਾਬਾ ਅੰਤਨਾਬਾ ਸੁੱਖ ਦਾ ਜਿਹੜਾ ਸੁਖ ਹੈ ਹੈ ਦਾ ਪ੍ਰਾਪਤ ਜਿੰਨੇ ਦਾ ਸੁੱਖ ਹੈ ਤਰੀ ਪਰ ਉਹਦਾ ਵਾਲੇ ਚੰਕਾਰ ਹੋਈ ਹੈ ਉਹਦੇ ਪ੍ਰਾਪਤੀ ਦਾ ਚੰਕਾਰ ਇਹ ਦੀ ਫਿਰ ਪ੍ਰਾਪਤ ਦੇ ਸਭਨ ਨਾਲ ਜੇ ਸਭ ਜੀ ਜਾ ਆਨੰਦ ਬਾਣੀ ਤੱਕ ਪਹੁੰਚਿਆ ਜੇ ਆਨੰਦ ਬਾਣੀ ਸੀ ਤਾਂ ਉਹ ਸੁਖ ਚੰਗਾਰ ਸੀ। ਸਾ ਉਹਦਾ ਰਾਸਿਆ ਸੁਖੀ ਰਸੀ ਉਹਦਾ ਪਤਾ ਲੱਗ ਗਿਆ ਕਿੰਨਾ ਸੁਖ ਹੈ। ਬੀ ਐਕਸਪਲੇਨਡ। ਜਿੱਥੇ ਕਬੀਰ ਨੇ ਕਿਹਾ ਅੱਜ ਜੋ ਤਹਾ ਕੁਝਮ ਰਸ ਪਾਵਾ। ਉਹ ਕਹੇ। ਉਹ ਅਕਾਇ ਕਹਾ ਕਾ ਇਸ ਨੂੰ ਚਾਹਵਾ ਉਹ ਹੈ ਕੋਈ ਕੁ ਮੀਰ ਨੇ ਗੱਲ ਕਹੀ ਸੀ ਨਾ ਉਹ ਇਹ ਕਹੀ ਅੰਤਰਾਂ ਤੋਂ ਜਿਸ ਤਸੰਦੀ ਆਸਰ ਉਹਨਾਂ ਵਿਆਦੀ ਲੋਕਾਂ ਕਾਇ ਇਹ ਤਸੰਦੀ ਆਸਰ ਜੋ ਕੋਲ ਖਾਇਆ ਪੁੱਛੇ ਤੇ ਉਹ ਉਹ ਵੀ ਗੱਲ ਹੈ ਆਪਣੇ ਆਪਣੇ ਤਰੀਕੇ ਨਾਲ ਕਹਤੀ ਗੱਲ ਇੱਕੋ ਸਾਰਿਆਂ ਨੂੰ ਹੋਇਆ ਉਸ ਸਾਰਿਆਂ ਨੂੰ ਠੰਕਾਰ ਹੋਈ ਜੀ ਸਾਰਿਆਂ ਨੇ ਉਹਦੇ ਬਸ ਸੱਚੀ ਆਪਣਾ ਆਪਣਾ ਸਭਲਾ ਪਹਿਲਾਂ ਨਹੀਂ ਦਸੀ ਉਹ ਤੋਂ ਵੱਖਰੇ ਤਰੀਕੇ ਨਾਲ ਦਸੀ ਉਹ ਉਹ ਹੀ ਥੋੜੀ ਦਸਦੀ ਉਹ ਨਾਲ ਕੋਈ ਜਦੋਂ ਮੋਰ ਕਹਤਾ ਹੋ ਜੀ ਸਿਮਰੇ ਸਹਿਜਨ ਜਿੰਨ ਕੋ ਪ੍ਰਭ ਮਿਆ ਬਿਆ ਬਿਆ ਦੀ ਬਿਆ ਬਿਆ ਹੁਦਾ ਤਾ सिमरे छह जन जिनको प्रभु मया मया मया मयाला मतलब होता है असल से जग में पेगड़ गया मया का मतलब अपन का मतलब पेगड़ गया इनको मया कहते हैं सिमरे छह ਸਿਲੈਕਸ਼ਨ ਹੋਈ ਹੋਈ ਹੈ ਉਹ ਵੀ ਪਹਿਲਾਂ ਸਿਲੈਕਸ਼ਨ ਹੋਈ ਹੋਈ ਹੈ ਬਲਨ ਸਿਲੈਕਟਰ ਤਾਂ ਹੈਗੇ ਨਾ ਦੋ ਪਧਾਰ ਤਾਂ ਹੈ ਉਹ ਦੇਖੋ ਸੇ ਸਰਕਾਰੀ ਖਰਚੇ ਤੇ ਸਮਰਦਾ ਉਹ ਜਿਹੜੇ ਸਰਕਾਰੀ ਖਰਚੇ ਤੇ ਨਹੀਂ ਪੜਦਾ ਜਾ ਕੇ ਦੇਖੋ ਦੂਰ ਸਰਕਾਰੀ ਖਰਚੇ ਤੇ ਪੜਦਾ ਅਸਲ ਤਾਂ ਤਕਾਗਲ ਉਹ ਉਹ ਫਿਰ ਉਹਨੂੰ ਫਿਰ ਰਹਿੰਦਾ ਉਹਦਾ ਪ੍ਰਭ ਹੋਇਆ ਇਹ ਗੰਦਾ ਉੱਥੋਂ ਬਾਅਦ ਸਰਕਾਰੀ ਖਰਚਾ ਸ਼ੁਰੂ ਹੋ ਸਕਦਾ ਉਹ ਤੋਂ ਪਹਿਲਾਂ ਨਹੀਂ ਹੋ ਸਕਦਾ ਸਤੋਗ ਪਕੜ ਜਾਂਦਾ ਸਤੋਗ ਉਹ ਬਹੁਤ ਸਤਰ ਸਤੋਗ ਉਹਦੇ ਆਪਾਰ ਕਰ ਕੇ ਕਈ ਗਾਂ ਖੜਾ ਕਰਦਾ ਫਿਰ ਵੀ ਕਾਫੀ ਦੇਰ ਬਣਿਆ ਰਹਿੰਦਾ ਕੱਚਾ ਜਲਾਪਣਾ ਸਤ ਸਤੋ ਉਹਦੇ ਨਾਲ ਜੀ ਬਣਦਾ ਉਹਨਾਂ ਜਿਹੜਾ ਮਾਰਦਾ ਉਹ ਖਤਰਾ ਉਹਨਾਂ ਨੂੰ ਫਿਰ ਉਹ ਵਿਚੇ ਅੜਕੇ ਚੀਜ਼ਾਂ ਦੀ ਖਤਰਾ ਵੀ ਫਿਰ ਜੇ ਨਾ ਰਜੇ ਪਰ ਪਰਚਾਲੀ ਗੱਲ ਵੀ ਹੋ ਜਾਂਦੀ ਹੈ ਪਾਉ ਪੰਕਤੂ ਪੰਘੂ ਆਨੇ ਤੇ ਮਾਇਆ ਫਾਸੂ ਮੇ ਰਜ ਮਾਇਕੀ ਬਚ ਕੇ ਰਹਿਣਾ ਮਾਇਆ ਤੋਂ ਫਿਰ ਨਾ ਫਾਸ ਜਾ ਕੇ ਰਹਿਣ ਦੋ ਹੋਰ ਬਸ ਸਤਿ ਸੰਤੋਖ ਇਦਰੋਂ ਆ ਰਹੇ ਪਹਿਲੇ ਸਈਦ ਹੁਣ ਦਾ ਜੇ ਨੋ ਰਿਹਾ ਜੇ ਪ੍ਰਪੱਚ ਰਾਜਗਰ ਮੈਂ ਅੱਜ ਫੜ ਗਿਆ ਤੇ ਘੱਟੇ ਜੁਰੂ ਕਰ ਲੈ ਉਹ ਤਾਂ ਸਾਰ ਨਾਲ ਚਲੂਗਾ ਮੌਜੂਦੀ ਕਰਦਾ ਪਹਿਲਾਂ ਥੋੜੀ ਰੇਤੀ ਕਰਦੇ ਫੇਰ ਹੌਲੀ ਹੌਲੀ ਹੌਲੀ ਅਸਨ ਤੇ ਗੁਰੂ ਅਰਜਨ ਦੇਵ ਜੀ ਤੋਂ ਲੱਗਿਆ ਵੀ ਸੰਗਤ ਉਹ ਸੀ ਗੁਰੂ ਅਰਜਨ ਦੇਵ ਉਹਰ ਕੋਲ ਦੀ ਉਹ ਹੋਰ ਤਰ੍ਹਾਂ ਦੀ ਗੱਲ ਸੀ ਉਹ ਤਾਂ ਅਲੱਗ ਹੀ ਬਦੇਸ ਚੱਲਦਾ ਸੀ ਪਰ ਅੱਗੇ ਚਲੇ ਗਿਆ ਅੱਗੇ ਚਲੇ ਗਿਆ ਇਹ ਜੱਗ ਗੱਲ ਵਧੀਆ ਲੱਗਦੀ ਸਾਰੀ ਚੱਲੀ ਆ ਇਹ ਨੁੱਤਲ ਦੀ ਸੰਗਤ ਵਧੀਆ ਤਾਂ ਆਪ ਵੀ ਲੱਗਦੀ ਦੋਸਤ ਇਮਰਨ ਸ਼ੇਜਨ ਜਿੰਨ ਕੋ ਪਰਬ ਗਿਆ ਵਾ ਵਾ ਵਾ ਦਿਉਣਾ ਨਾਲੇ ਤੇ ਜਨ ਸਰਨੇ ਪਿਆ ਨਾਲ ਜਤਾ ਹੁਣਾ ਜਨਾ ਦੇ ਸਰਦੀ ਪਿਆ ਇਹ ਕਹਿੰਦੇ ਅਸੀਂ ਤਾਂ ਉਹਨਾਂ ਦੇ ਸਰਦੀ ਪਿਆ ਜਿਨ੍ਹਾਂ ਤੇ ਪ੍ਰਭ ਗਿਆ ਸੀ ਸਾਨੂੰ ਪਹਿਲਾਂ ਮਰਾ ਸੀ ਉਹ ਰਾਮਲਾਸ ਤੇ ਰਾਮਲਾਸ ਤੇ ਮਰਾ ਸੀ ਅਸੀਂ ਉਹਨਾਂ ਦੀ ਸਰਦ ਪਏ ਉਹ ਦੋ ਭਾਈ ਆਕੀ ਰਹਿ ਗਏ ਇਹਦਾ ਮਤਲਬ ਹੈ ਜਾਦੂ ਪਹਿਰੀ ਉਹ ਤੇ ਜੀ ਆ ਵੀ ਰਾਮ ਉਹ ਆ ਉਹ ਤੋਂ ਸਾਨੂੰ ਕੋਲਾ ਉਹ ਜੇਕਰ ਉਹ ਜਿਆ ਪਰਿਆ ਨਹੀਂ ਮੋਹਣ ਪਰਿਆ ਨਹੀਂ ਨਾ ਮੋਹਣ ਜੀ ਇਹ ਕਹਿੰਦੇ ਅਸੀਂ ਤਾਂ ਉਹਨਾਂ ਦਾ ਤਾਰੀ ਪਾਈ ਚਾਲੀ ਪਾਈ ਸੀ ਉਹ ਦੂਜੇ ਅੰਡੇ ਤੇ ਕਿਹਾ ਉਹ ਆਪਣੇ ਹੋ ਗਏ ਨੇ ਸੀ ਜਿਹੜਾ ਮਹਾਦੇਵਰ ਉਹ ਪਾਣੀ ਤਾਂ ਨਵੀ ਰਚੀ ਆ ਪਰ ਉਹ ਨਹੀਂ ਆ ਸਕਦੀ ਜੀ ਹਾਂਜੀ ਪਰ ਸਿਮਰਨ ਸਭ ਤੋਂ ਪਰ ਇਹਦਾ ਮਤਲਬ ਕੋਈ ਘਰ ਦੀ ਗੱਲ ਜਰੂਰ ਚੱਲਦੀ ਹੈ ਇਹ ਹੈ ਘਰ ਦੀ ਗੱਲ ਦਾ ਇਹਦੇ ਵਿੱਚ ਜਦ ਜਾਂਦ ਸਾਲ ਦੀ ਪਿਆ ਆਪਣੀ ਪਰਸਨਲ ਗੱਲ ਕਾਇਦੇ ਵਿੱਚ ਪਾਈਆਂ ਵੱਲ ਇਸ਼ਾਰਾ ਵੀ ਕਰਕੇ ਫਿਰ ਆਈ ਦਾ ਕਾਰਨ ਵੀ ਰਸੀ ਕੋਈ ਕੋਈ ਲੜਾਈ ਨਹੀਂ ਸੀ ਘਰ ਚ ਕੋਈ ਐਸੀ ਗੱਲ ਚੱਲੀ ਹੋਊਗੀ ਵੀ ਜੀ ਮੇਰੇ ਨਾਲ ਬਦਨਾਮੀ ਹੋ ਗਿਆ ਕਿਹੜੀ ਗੱਲ ਤੇ ਕਾਦੀ ਬੁढ़ाई ਕੀਤੀ ਸਮਝ ਨੂੰ ਕਹਿੰਦਾ ਸਮਝਾ ਤਾ ਉਹਦੇ ਸੀ ਕੋਈ ਨੂੰ ਕਹਿੰਦਾ ਜੇ ਜਾਂਦੀ ਬੋਦੀ ਲੋੜ ਹੋ ਜੀ